श्लोक मोहल्ला पहला ਸਰਵਰ हंस तुरही मेला खसमे एवेपाणा सर्वर अंदर हीरा ਸਰਵਰ सो ਹੀਰਾ ਮੋਤੀ ਸੋ करुणा ਕਾ की है जिथे सर्वरैनो तोर ओथे ही हंस है ए आंचदाते आन बहुत दूर है कते सर्वर दे करनारे दे बैठ के ਸਰਵਰ ਦੇ ਵਿੱਚ بیٹھ ਕੇ ਵੀ ਸਰਵਰ ਦੇ ਧਿਆਨ ਦੀ ਇੱਛਾ ਹੈ ਇਹਦੀ ਦੁਨੀਆਂ ਦੇ ਵਿੱਚ ਹੈ ਦੁਨੀਆਂ ਦੀ ਜਿਹੜੀ ਹੈ ਨਾ ਪਦਾਰਥ ਇਹਨਾਂ ਦੀ ਇੱਛਾ ਭੁੱਖ ਹੈ ਇਹਦੇ ਇਹਦਾ ਖਾਣਾ ਸਰਵਰ ਦੇ ਵਿੱਚ ਹੈ ਜਿਹੜੇ ਸਰਵਰ ਦੇ ਕੋਲ ਹੈ ਖੜਾ ਤੁਰੇ ਖੜਾ ਜਿੱਥੇ ਖੜਾ ਉੱਥੇ ਹੀ ਉਹ ਇਹ ਬਾਹਰ ਝਾਕਦਾ ਖਾਣਾ ਕਸਮ ਨਹੀਂ ਚਾ ਇਹ ਹੈ ਕਿ ਇਹਦਾ ਖਾਣਾ ਆ ਜਾਂਦਾ ਆਪਣਾ ਭਾਣਾ ਨਹੀਂ ਨੂੰ ਖਾਣ ਦਿੰਦਾ ਉੱਥੇ ਰਹਿਣ ਦਿੰਦਾ ਕੋਈ ਜੀ ਸਰਬਰ ਅੰਦਰ ਹੀਰਾ ਮੋਤੀ ਉਹ ਸਰਬਰ ਅੰਦਰ ਹੀਰੇ ਮੋਤੀ ਹੈਗੇ ਨੇ ਸੋਹਣਾ ਘਰ ਉੱਤਰਾ ਘਰ ਨਹੀਂ ਦੇਈ ਇਹਦੇ ਅੰਦਰ ਹੀ ਸਭ ਕੁਝ ਹੈ ਜੋ ਕੁਝ ਕਰਮ ਸੋ ਟੋੜ ਖਾਏ ਤੇਰੇ ਅੰਦਰ ਕਾਜ ਜਿਹੜਾ ਕੋਸ ਹੈਗਾ ਉਹ ਟੋੜ ਖਾ। ਔਰ ਕਿਸੇ ਕੋਈ ਕਾਹੇ ਕੋ ਜਾਏ ਤੂੰ ਇਹ ਔਰ ਕਿਸੇ ਦੀ ਗੱਲਾਂ ਸੁਣਨਾ ਜਾ ਅਸਲੇ ਸ਼ਬਦ ਵਿਚਾਰ ਕਰਾ ਹੈ ਤੇ। ਗੁਰਮਤਿ ਵਿੱਚ ਸਭ ਕੁਝ ਹੈ। ਗੁਰਮਤਿ ਨੂੰ ਯਾਦ ਵਿਚਾਰ ਕਰਾਂਗੇ ਸਭ ਕੁਝ ਵਿੱਚੋ ਹੀ ਮਿਲ ਜਾਂਦਾ। ਇਹ ਖਾਣਾ ਸਾਡਾ ਸੱਚ ਕਰਨਾ ਸੱਚ ਪਹਿਨਣਾ। ਹਾਂ ਇਹ ਹੀ ਖਾਣਾ ਅਸਲ ਦੇ ਵਿੱਚ। ਕਿਤੇ ਸੱਲ ਬੜਾ ਉੱਥੇ ਹਰ ਤਰ ਉਹ ਉੱਥੇ ਟਰਕੀ ਬਾੜੀ ਹੋਣੀ ਹੈ ਹੀ ਨੇ ਲੋਏ ਹੁਣ ਵੀ ਇਕੱਠੇ ਹੀ ਨੇ ਅੱਛਾ ਸਰਵਸਾਡੇ ਅੰਦਰ ਹੈ ਜੀ ਅੰਦਰ ਹੈ ਔਰ ਸਰਵਰ ਹੈ ਸਤਗੁਰੇ ਸਰਬ ਨਾ ਸਤਗੁਰੇ ਸਰਬ ਸਰੂਪ ਹੈ ਹਰ ਜੀਵ ਹੈ ਜਿਤਾ ਜੀਵ ਕਿਹੜਾ ਹੀ ਰੇਮੋਤੀ ਬੇਤ ਹੰਸਾ ਨਹੀਂ ਫਿਰ ਕੌਣ ਸਰਬ ਕੋਈ ਕਹਿਣਾ ਆਪਣੇ ਆਪ ਨੂੰ ਹਮਮ ਬਾਹਰ ਗੱਲਾਂ ਕਰਦਾ ਖਾਣ ਪੀਣਦੇ ਬਾਹਰ ਦੀਆਂ ਉਹਨੂੰ ਘਰ ਨੇ ਵੀ ਜਿੱਤੇ ਦੂਰ ਦਰ ਹੈ ਤੇਰਾ ਰਾਂਡਾ ਉੱਥੇ ਤੂੰ ਬਾਸੀ ਗੱਲਾਂ ਕਰਦਾ ਤੂੰ ਬਾਸ ਫਲਾਲ ਤੋਂ ਦੇ ਬੜੇ ਵਧੀਆ ਨੇ ਫਲਾਲ ਤੋਂ ਬੜੇ ਵਧੀਆ ਨੇ ਫਲਾਲ ਤੋਂ ਬੜਾ ਵਧੀਆ ਹੋਊਗਾ ਤੇਰਾ ਖਾਨਾ ਤੈਨੂੰ ਵਧੀਆ ਸ਼ਰੀਰ ਦਾ ਖਾਣਾ ਆਹ ਤੋਂ ਸਹੀ ਹੈ ਬਸਨਾ ਖਾਣ ਹੀ ਰੇ ਬੋਤੀ ਹੁੰਦਾ ਪਰ ਮਨ ਜਨੂਨ ਖਾਇਆ ਹੋਇਆ ਗੱਲਾਂ ਕਰਦਾ ਬਾਹਲੇ ਪਦਾਰਥ ਖਾਂਦੀ ਜੀ ਕਹੀ ਹੋਈ আচ্ছা ਪਰ ਇਹ ਜਿਹੜਾ ਹੰਸ ਹੈ ਇਹ ਕਦੋਂ ਹੰਸ ਹੁੰਦਾ ਜੀਵ ਜੀਵ ਕਿਹੜੀ ਸਟੇਜ ਤੇ ਹੰਸ ਬਣਦਾ ਜੀ ਅੰਦਵਰ ਅੰਦਵਰ ਜਿਹਾ ਸਭ ਹੋ ਜਨਨਾ ਜਾਏ ਕਹਿੰਦੇ ਬਾਹਲਾ ਪਦਾਰਥ ਹੈ ਮੇਰਾ ਖਾਣਾ ਸੱਚਾ ਖਾਣਾ ਸੱਚ ਪੈਣਾ ਤੇ ਆਂਛਾ ਹੈ ਵੇਰੀ ਖੁਰਾਕ ਔਰ ਭਾਣੀ ਜਮਲੂ ਦੀ ਇਹ ਮੇਰੀ ਖਰਾਕ ਉਹ ਗੁਰਬਾਨੀ ਚ ਹੈ ਸ਼ਬਦ ਵਿਚਾਰ ਚ ਹੈ ਸ਼ਰੀਰ ਦੀ ਖਰਾਕ ਤੋਂ ਥਾ ਹੈ ਇਹ ਦਾਲ ਹੋਇਆ ਹੋਇਆ ਵੀ ਹੰਸੇ ਹੁੰਦਾ ਕਦੇ ਕਦੇ ਕਿ ਨਹੀਂ ਖਰਾਕ ਦਾ ਜਿਹੜਾ ਹੈ ਨਾ ਤੇ ਸਹੀ ਦਾਲ ਕਰਦਾ ਜਿਹੜਾ ਸ਼ਰੀਰ ਦੀ ਖਰਾਕ ਨੂੰ ਆਪਣੀ ਖਰਾਕ ਮੰਨ ਲਿਆ ਫਿਰ ਦਾਲ ਹੈ ਤੇ ਸ਼ਰੀਰ ਦੀ ਖਰਾਕ ਨੂੰ ਆਪਣੀ ਖਰਾਕ ਨਾ ਮੰਨਿਆ ਫਿਰ ਦਾਲ ਨਹੀਂ ਹੈ ਵੀ ਖੜਾ ਕੋਈ ਇਹਦੀ ਖਰਾਕ ਜਦ ਇਹ ਆਪਣਾ ਵੀ ਗੈਰ ਭੋਜਨ ਫਿਰ ਗਿਆਨੀ ਵਾਲਾ ਬਣਾ ਦਿੰਦਾ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਦੇ ਜਿਕ ਨਾ ਪਾਇਓ ਉਥੈ ਉਹਨਾਂ ਹੋਰੋ ਰਹੀ ਸਰਵਰ ਬੜੇ ਸਰੋਗਲਾਂ ਦੇ ਬਗਲੇਰ ਰਹਿੰਦੇ ਹੁੰਦੇ ਪਰ ਵੀ ਕਹਿ ਰਹ ਹੋਵੇ ਅਤ ਸਿਆਣਾ ਜੇ ਅੱਤ ਸਿਆਣਾ ਹੋਵੇ ਉਹ ਕਲਾਕ ਫੇਰ ਉਹ ਨਹੀਂ ਰਹਿੰਦੇ ਜੇ ਸਿਆਣਾ ਘੱਟ ਹੋਵੇ ਫੇਰ ਰਹਿੰਦੇ ਉਹ ਖਾਬ ਨਹੀਂ ਚਲੇ ਜਾਂਦੇ ਦੂਰ ਚਲੇ ਜਾਂਦੇ ਨਹੀਂ ਇਹਦਾ ਇਹ ਪਾਵਤਾ ਨਹੀਂ ਵੀ ਜੇ ਅੱਤ ਸਿਆਣਾ ਹੋਵੇ ਤਾਂ ਨਹੀਂ ਉਹ ਸਰਵਰ ਤੇ ਰਹਿੰਦਾ ਨਹੀਂ ਸਰਵਰ ਤੇ ਫਰਾਤ ਹੈ ਬਗਲੇ ਦੀ ਹਰ ਕੋ ਪਰ ਉਹ ਰੇਂਦਾ ਨੀ ਗੁਰੂ ਘਰ ਕਿਹ ਜਿਹੜਾ ਗੁਰੂ ਘਰ ਸੀ ਉਹ ਸੀ ਸਰਵਰ ਤੋਂ ਸਰਬਰ ਤੋਂ ਉਹ ਦੁਨੀਆ ਦੀਆਂ ਛਪੜੀਆਂ ਜੇ ਆਕ ਗਿਆਣਾ ਹੋਵੇ ਤਾਂ ਉਹ ਸਰਬਰ ਤੇ ਗਿਆਣਾ ਬਗਲਾ ਹੋਵੇ ਚਾਹੇ ਕਾਗ ਹੋਵੇ ਬਹੁਤਾ ਗਿਆਣਾ ਹੋ ਜਵੇ ਨਾ ਜਾ ਲੋ ਫੇਰ ਨਹੀਂ ਹੋ ਰੇਂਦਾ ਸਰੋਵਰ ਤੇ ਫੇਰ ਉਹ ਆਡੋ ਜਾਂਦਾ ਸਰੋਵਰ ਤੋਂ ਉਹ ਬਰਮੀ ਮਤ ਬਣਾ ਲੈਂਦਾ ਬੜੀ ਛਪੜੀ ਜੀ ਆਪਣੀ ਅਡ ਬਣਾ ਲੈਂਦਾ ਅਡ ਬੰਤਾ ਕਰ ਲੈਂਦਾ ਹਾਂਜੀ ਜਿੰਨੀਆਂ ਸੰਪਰਦਾਵਾਂ ਇਹ ਇਸ ਤਰ੍ਹਾਂ ਦੇ ਲੋਕਾਂ ਨੇ ਬਣਾਈਆਂ ਜੀ ਬੱਸ ਬੱਸ ਹੈ ਇਹਨਾ ਤੁਸੀਂ ਪੁੱਝ ਲਈ ਬਹੁਤ ਸਿਆਣੇ ਸੀ ਇਹ ਉਹ ਫਿਰ ਉਹਨਾਂ ਲੀਡਰ ਦੀ ਲੜਾਈ ਸੀ ਆਪ ਆਪਣੀ ਖੋਦਾਲੀ ਬਣਾ ਲਈ ਹਾਂਜੀ ਉਹਨਾਂ ਰਿਜਕ ਨਾਲ ਪਾਇਓ ਉੱਥੇ ਉਹਨਾਂ ਹੋਰੋਂ ਖਾਣਾ ਉਹਨਾਂ ਦਾ ਰਿਜਕ ਉੱਥੇ ਨਹੀਂ ਹੁੰਦਾ ਫਿਰ ਉਹਨਾਂ ਦਾ ਖਾਣਾ ਬਦਲ ਜਾਂਦਾ ਹੋਰੋਂ ਖਾਣਾ ਹੁੰਦਾ ਉਜੇ ਹੁਣ ਵਰਕਾਨੀ ਦਾ ਭੋਜਨ ਗਿਆਨ ਛੱਡ ਕੇ ਛੱਡ ਦਿੱਤਾ ਹੈ ਹੋਇਆ ਹੋਵੇ ਗੁਰਬਾਣੀ ਰੋਜ਼ ਪਤਾ ਟਕੇ ਬਾਣੀ ਵੀ ਬੜੇ ਕੀਰਤਨ ਵੀ ਸੁਣੇ ਖਾਣਾ ਤਾਂ ਹੋ ਰਹੀ ਹੈ ਦੇ ਵਿੱਚੋਂ ਕੀ ਮਿਲਦਾ ਇੱਥੇ ਤਾਂ ਨੀਗਾ ਕਿਸੇ ਦੀ ਹੈ ਕਰਦੇ ਹਾਂ ਸਾਡੀ ਇੱਛਾ ਹੁੰਦੀ ਹੈ ਕਿਉਂ ਵੀ ਮਾਇਆ ਦੀ ਹੋ ਉਹ ਖਾਣੇ ਉਹਨਾਂ ਦਾ ਤੇ ਦਾ ਖਾਣਾ ਹੁੰਦਾ ਫਿਰ ਨਾ ਤਾਂ ਤੇ ਸਿਆਣੇ ਸੀ ਬੰਦੇ ਨਾ ਉਹ ਛੱਡਦੇ ਸੀ ਇਹ ਲੋਰ ਫਿਰ ਜੀ ਛੱਡਦੇ ਸਰਵਰ ਨੂੰ ਹਾਂਜੀ ਠੀਕ ਹੈ ਜੀ ਹੋਰ ਉਹ ਜਿਹੜਾ ਸਰਵਰ ਦੇ ਵਿੱਚ ਖਾਣਾ ਉਹ ਹਾਂਜੀ ਸੱਚ ਕਮਾਣਾ ਸੱਚੋ ਪਾਈਏ ਕੂੜਾ ਕੂੜਾ ਮਾਣਾ ਇਹਨਾਂ ਨੇ ਸੱਚ ਦੀ ਕਮਾਈ ਕਰ ਹੈ ਸੱਚ ਕਮਾਣਾ ਸੱਚਿਓ ਭਾਈ ਸੱਚ ਦੀਓ ਪ੍ਰਾਪਤੀ ਹੋਣੀ ਉਤੋਂ ਕੂੜੇ ਕੂੜਾ ਹਨ ਢੱਲੂ ਢੂਠੇ ਤੇ ਮਾਣੋ ਆਪਣਾ ਝੂਠ ਤੇ ਕੂੜ ਦਾ ਫਾਇਆ ਦਾ ਫਾਇਆ ਕਿਸੇ ਕੋ ਜਾਲਾ ਮਾਇਆ ਕੂੜੀ ਹੈ ਝੂਠੀ ਹੈ ਰਾਜ ਕੂੜ ਦੀ ਕਮਾਈ ਦਾ ਕੂੜੀ ਮਾਇਆ ਬੀਤਾ ਹੈ ਉਹਦਾ ਵੀ ਮਾਣ ਹੁੰਦਾ ਉਹ ਰੋ ਦਾ ਹਰ ਹਾਂਜੀ ਨਾਨਕ 3 ਕੋ ਸਤਿਗੁਰ ਮਿਲਿਆ ਜਿਨ੍ਹਾਂ ਤੁਰੈ ਪਿਆ ਪਰਵਾਣਾਂ ਆ ਲੈ ਤਾ ਨੇ ਸਤਿਗੁਰੂ ਨੂੰ ਵੜਿਆ ਜਿਹਨਾਂ ਪੁਰੇ ਪੈ ਗਿਆ ਜਿੱਥੇ ਸੀ ਉੱਥੇ ਹੀ ਸੀ ਉੱਥੇ ਹੋ ਗਏ ਉਹਨੇ ਪ੍ਰਵਾਨ ਕਰ ਲਿਆ ਪਰ ਆਤਮ RAM ਲੈ ਪ੍ਰਵਾਨ ਜਦ ਦੇਖਿਆ ਨੇ ਵੀ ਆਤਮ ਤੁਸੀਂ RAM ਪ੍ਰਵਾਨ ਕਰਦਾ ਬੁੱਧੀ ਨੂੰ ਜਿਹਨੇ ਕਰ ਲਿਆ ਉਹਨੇ ਤਾਂ ਉੱਥੇ ਹੀ ਕਰ ਲਿਆ ਆ ਜਿਹੜਾ ਤੇਰੇ ਨਾਲ ਖੜਾ ਸਾ ਲੈ ਰਿਹਾ ਆਤਮ ਇਹ ਪ੍ਰਵਾਨ ਉੱਥੇ ਹੀ ਦਾ ਲੱਕ ਉੱਥੇ ਕੋਈ ਤੀਰਥਾਂ ਤੇ ਫਿਰਦਾ ਕੋਈ ਗੰਗਾ ਜਲਾਬ ਰਾਮ ਦੀ ਗੱਲ ਨਾ ਮੈੜੀ ਹੋਗੀ ਸੰਤਰਾ ਫਿਕਰ ਪਿਆ ਹੋਇਆ ਹਾਂਜੀ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀ ਹੈ ਸਦਾ ਸਦਾ ਜੋ ਦੇ ਮੇਰਾ ਸਾਹਿਬ ਦਾ ਉਜਲਾ ਬਿਲਕੁਲ ਚਿੱਟਾ ਕੋਈ ਦਾਗ ਨਹੀਂ ਹੈ ਸਵੇਤ ਪਰਦਰਸ਼ੀ ਦਾ ਰੰਗ ਹੈ ਜੇ ਕੋ ਚਿਤ ਕਰੇ ਜੇ ਕੋ ਚਿੱਤਰ ਚ ਦੇਖਣਾ ਚਾਹੇ ਦੇਖ ਲਵੇ ਚਿੱਤਰ ਚ ਬਸਾ ਕੇ ਦੇਖ ਲਵੇ ਉਜਲਾ ਹੈ ਚ ਬਸਾ ਲਵੇ ਪਰਖ ਲਵੇ ਦੇਖ ਲਵੇ ਉਜਲਾ ਹੈ ਸਹਿਬ ਹੈ ਮਾਇਆ ਤੇ ਪਾਰ ਵੀ ਨਹੀਂਦਾ ਉਹਨੂੰ ਮਾਇਆ ਤੇ ਪੜੇ ਜਿਹੜਾ ਦੁਨੀਆ ਦੀ ਦੀ ਮਾਇਆ ਤੋਂ ਪਰੇ ਦੀ ਰੂਹ ਨਹੀਂ ਦੀ। ਨਾਲ ਕੋਈ ਸੇਵੀ ਐ ਸਦਾ ਸਦਾ ਜੋ ਦੇਣਾ ਨਾ ਪਾਏ ਲੈਣ ਵਾਲੇ ਥੱਕ ਜਾਣ ਤੇਨ ਵਾਲਾ ਨਾ ਥਕੇ। ਉਹਦੀ ਸੇਵਾ ਕਰਨੀ ਚਾਹੀਦੀ। ਵਾਹਿ ਜੀ। ਕਰੇ ਤੋਂ ਕੀ ਭਾ ਬਣਦਾ ਮੇਰਾ ਉਜਲਾ ਜੇ ਕੋ ਚਿੱਤ ਕਰੇ ਜਿੱਤ ਕਰਕੇ ਦੇਖੋ ਚੇਤਾ ਕਰਕੇ ਦੇਖੋ ਆਪਣੇ ਅੰਦਰ ਅੱਛਾ ਜੀ ਬਾਹਰੋਂ ਦੇਖੋ ਅੰਦਰੋਂ ਦੇਖੋ ਇਹ ਸਾਹਿਬ ਸਤਿਗੁਰਈ ਹੈ ਜੀ ਹਾਂ ਜੀ ਨਾਨਕ ਦੁਖ ਜਾਏ ਅਵਗੁਣ ਵੰਜਣ ਗੁਣ ਰਵੈ ਮਨ ਸੁਖ ਵਸੈ ਆਏ ਓਦੀ ਸੇਵਾ ਕਰੀਏ ਜੀ ਸੇਵਾ ਕਰਨ ਨਾਲ ਦੁੱਖ ਚਲੇ ਜਾਂ ਤੁਕਨ ਨਾ ਸੋਚਵੇ ਦੁੱਖ ਨਹੀਂਦਾ ਦੁਖੀ ਕੀਤਾ ਹੈ ਇਹ ਦੁੱਖ ਨਹੀਂ ਨਾਇਬ ਸੇਵਾ ਦਾ ਕੀ ਫਾਇਦਾ ਫਲ ਕੀ ਮਿਲਿਆ ਆ ਆਉਣ ਵੰਝਣਾ ਗੁਣ ਰਵਾਂ ਮਾਨ ਸੁਖ ਵਸੇ ਆਏ ਉਹ ਗੁਣ ਸਾਰੇ ਚਲੇ ਜਾਂ ਆ ਕੇ ਬਹਿ ਜਾਣ ਉਹਨਾਂ ਦੀ ਜਗ੍ਹਾ ਮਨ ਵਿੱਚ ਸੁਖ ਜਿਹੜਾ ਵਸੇ ਆਏ ਆ ਕੇ ਸੁਖ ਦੁਬਾਰਾ ਵਸੇ ਹੁਣ ਤਾਂ ਸੁਖ ਗਾਇਬ ਹੈ ਮਨ ਵਿੱਚ ਸੁਖ ਨਹੀਂ ਹੈ ਦੁਬਾਰਾ ਬਸੇ ਵਿੱਚ ਸੁਖ ਆ ਕੇ ਪਰਮੇਸ਼ਰ ਜੀ ਬੇ ਟਿਕ ਜੀ ਬੇ ਹਾਂ ਜੀ ਠੀਕ ਹੈ ਜੀ ਇੱਥੇ ਨਾਨਕ ਸੋਈ ਸੇਵੀ ਆ ਇੱਕ ਜਗ੍ਹਾ ਬਿਹਾਰੀ ਨਾਲ ਲਿਖਿਆ ਦੂਜੀ ਜਗ੍ਹਾ ਸਿਹਾਰੀ ਨਾਲ ਇਹਨਾਂ ਦੇ ਅਰਥਾਂ 'ਚ ਫਰਕ ਪੈਂਦਾ ਜੀ ਸੋਈ ਸੇਵੀ ਨਾ ਉਸ ਸੇਵੀ ਆ ਜਿਹਦੀ ਸੇਵਾ ਕਰਨ ਕਰਕੇ ਦੁੱਖ ਜਾਂਦਾ ਠੀਕ ਹੈ ਜੀ ਇੱਕ ਤਾਂ ਸੇਵੀ ਐ ਹੁਕਮ ਹੋ ਗਿਆ ਦੂਵੇ ਜੇਦੀ ਸੇਵਾ ਕਰਨ ਕਰਕੇ ਕੰਮ ਕਰਕੇ ਜਾਂਦਾ ਉਹਨੂੰ ਸੇਵਣ ਦੀ ਚਾਹੀਦਾ ਉਹਦੀ ਸੇਵਾ ਦਾ ਲਾਭੇ ਕੋਈ ਨਹੀਂ ਇਹ ਦੁੱਖ ਸਭ ਤੋਂ ਵੱਡਾ ਇੱਥੇ ਇੱਕ ਦੁੱਖੇ ਲਿਖਿਆ ਹੈ ਇਹ ਔਂਕਣ ਨਾਲ ਵੀ ਇਹ ਜੰਮਣ ਮਰਨਾ ਸਭ ਤੋਂ ਵੱਡਾ ਦੁੱਖ ਹੈ ਜੀ ਹਾਂ ਇੱਕ ਦੁੱਖ ਰਾਜਾ ਆਰਾਮ ਰਹਿਟ ਔਰ ਗਰਭ ਬਸੇਰਾ ਅਗਰ ਉਹਦੇ ਵਿੱਚ ਬਸੇਰਾ ਆਰਾਮ ਗਰਭ ਦੇ ਵਿੱਚ ਗਰਭ ਦਾ ਬਸੇਰਾ ਹੈ ਇੰਤਾਂ ਦੀ ਅਗਨ ਨਹੀਂ ਇਥੇ ਇਹ ਦੁੱਖ ਇਹ ਗਰਭ ਕੇ ਬਸੇਰਾ ਆਪਣਾ ਸੁਪਨਾ ਗਰਭ ਕੇ ਦੇਖਦੇ ਆ ਨਾਮ ਗਰਭ ਹੈ ਠੀਕ ਹੈ ਜੀ ਹਾਂ ਜੀ ਕੋੜੀ ਆਪੇ ਆਪ ਵਰਤਦਾ ਆਪ ਤਾੜੀ ਲਾਇਨ ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀਆਇਨ ਆਪੇ ਆਪ ਵਰਤਦਾ ਆਪੇ ਆਪ ਵਰਤਦਾ ਆਪਣੇ ਵਰਦੀਆਂ ਵਰਤਦਾ ਚਾਹੇ ਆਪਣਾ ਕੰਮ ਝੋਲ ਲੈ ਚਾਹੇ ਬਗਾਲ ਲੈ ਆਪੇ ਤਾੜੀ ਲਾਇਨ ਆਪੇ ਤਾੜੀ ਲਾ ਕੇ ਦੇਖ ਵੀ ਰਿਹਾ ਸਭ ਕੁਝ ਆਪਣਾ ਨਫਾ ਨੁਕਸਾਨ ਵੀ ਦੇਖ ਰਿਹਾ ਕਿੱਧਰ ਕਹਿ ਕਿੱਧਰ ਜੀ ਜੋ ਕੰਮ ਕਰਦਾ ਹੈ ਉਹ ਕਾੜਦਾ ਵੀ ਹੈ ਵੀਚ ਘਾਟਾ ਮਦਦਾ ਹੈ ਆਪੇ ਹੀ ਉਪਦੇਸ਼ ਦਾ ਆਪੇ ਉਪਦੇਸ਼ ਹੈ ਮਨ ਨੂੰ ਆਪੇ ਉਪਦੇਸ਼ ਦਿਆ ਬੁੱਧੀ ਉਪਦੇਸ਼ ਦਿਆ ਮਨ ਆਪਾ ਆਪਣੀ ਮਰਜ਼ੀ ਹੈ ਜਿਹੜੀ ਉਹ ਮਰਜ਼ੀ ਹੈ ਉਸ ਵਿੱਚ ਫਿਰ ਆਪਣੇ ਆਪ ਨੂੰ ਉਪਦੇਸ਼ ਦਿੰਦਾ ਨਹੀਂ ਮਰਜ਼ੀ ਫਿਰ ਦੀ ਉਪਦੇਸ਼ ਤਾਂ ਉਪਦੇਸ਼ ਦਾ ਗੁਰਮੁਖ ਪਤੀ ਆਇਆ ਗੁਰਮੁਖ ਜਿਹੜੇ ਹੁੰਦੇ ਨੇ ਉਪਤੀ ਜਦੋਂ ਇਹ ਪਰੋਸਾ ਜਾਂਦਾ ਹੈ ਕੁਰਬਾਨੀ ਤੇ ਜਦ ਮਹੇਤਵ ਮੰਨੂਬ ਦੇ ਜਵੀ ਭਾਈ ਗੱਲ ਠੀਕ ਹੈ ਕੁਰਬਾਨੀ ਤੇ ਬੰਨਣਾ ਚਾਹੀਦਾ ਪਰ ਲਾਭ ਹੈ ਇਹਦੇ ਬੰਨਣਾ ਚਾਹੀ ਸਾਰੇ ਦੁੱਖਾਂ ਫਿਰ ਉਹ ਗੁਰਮੁਖ ਜਿਹੜੇ ਹੁੰਦੇ ਨੇ ਉਹਨਾਂ ਨੂੰ ਯਕੀਨ ਆ ਜਾਂਦਾ ਹੁੰਨ ਲੈਂਦੇ ਨੇ ਉਹ ਸੱਚ ਕਰਨ ਚਲੇ ਸੁਖ ਸਾਗਰ ਚ ਪ੍ਰਵੇਸ਼ ਕਰ ਜਾਂਦੇ ਹਾਂਜੀ ਆਪੇ ਉੱਜੜ ਪਾਈਨ ਇਕ ਭਗਤੀ ਲਾਇਨ ਜਿਸ ਆਪ ਬੁਝਾਇ ਸੋ ਬੁਝਸੀ ਆਪੇ ਨਾਏ ਲਾਇਨ ਆ ਰਸਤੇ ਵੀ ਪਾਦਦਾ ਇੱਕ ਆਪੇ ਉਜੜ ਪਾਈਏ ਨੂੰ ਇੱਕ ਭਗਤੀ ਲਾਇਨ ਇੱਕ ਭਗਤੀ ਲਾ ਲੇ ਉਹ ਕਹਿੰਦਾ ਠੀਕ ਹੈ ਆਪਣੇ ਆਪ ਕੋ ਭਗਤੀ ਲਾ ਕੇ ਇੱਕ ਇੱਕ ਆਪਣੇ ਆਪੇ ਉਜੜ ਪੈ ਗਿਆ ਗਿਆਨ ਉਹਦਾ ਉਹ ਵੀ ਉਹੀ ਆਉਦਾ ਵੀ ਉਹੀ ਉਦੀ ਉਦੀ ਵੀ ਹੋਈ ਹੈ ਉਹਦੀ ਵੀ ਹੋਈ ਜਿਸ ਪਰਮੇਸ਼ਰ ਜਾਲ ਸਲਾਹ ਹੋਵੇ ਕਿ ਉਹਦੀ ਨਿਗਾ ਸਿੱਧੀ ਹੋਵੇ ਕਿਰਪਾ ਹੋਵੇ ਫਿਰ ਉਹ ਜਲਦੀ ਪੈਂਦਾ ਤੇ ਇਹਦੇ ਕੋ ਦਲੀਲ ਹਾਵੀ ਹੋ ਜਾਂਦੀ ਹੈ ਫਿਰ ਜਿਹੜੀ ਸਲਾਹ ਬੇਸਲਾ ਕਰਦਾ ਬੇਸਲਾ ਨਹੀਂ ਕਰਦਾ ਫਿਰ ਰੋਪ ਨਾਲ ਜੁੜਦੀ ਨਾਮ ਦੀ ਪ੍ਰਾਪਤੀ ਦੀ ਫਿਰ ਨਾਮ ਨਾਲ ਜੁੜ ਜਾਂਦਾ जिस जिस आप बुझाए सो बुझसी आपे नाए लायन जद कहना काल नान खावे का बारी फिर पता लगदा है भी वो बारी महां आई है गोविंद बल सम, के तेरी वरिया जद पता लगदा हो ਨਾਵਨ ਲਾਤਾ ਇਹ ਨਾਮ ਨਾਉ ਵੀ ਆਉਂਦਾ ਤੇ ਨਾਏ ਵੀ ਆਉਂਦਾ ਠੀਕ ਹੈ ਜੀ ਬੋ ਬੋ ਜਨਾ ਗੁਰਾਂ ਨਾਲ ਲਾਤਾ ਨੂੰ ਹਾਂ ਜੀ ਨਾਨਕ ਨਾਮ ਤੇ ਆਈਏ ਤੇ ਵਡਿਆਈ ਸੱਚੀ ਹੈ ਸੋ ਸਾਡ ਵੀ ਸੱਚੀ ਵਡਿਆਈ ਹੈ ਜਿਹੜੀ ਅਸੀਂ ਕਰਾਂ ਵਡਿਆਈ ਉਹ ਵੀ ਸੱਚੀ ਹੈ ਸੱਚੀ ਵਡਿਆਈ ਕੀਤੀ ਹੈ ਬਿਨਾਂ ਆਪਦੇ ਜੋੜੇ ਤੇ ਬਿਰਨ ਨਾਮ ਨਾਲ ਚੋਰਤ ਦਾ ਇੱਕ ਮਕੋਲੇ ਤੇ ਵਿੜਾਈ ਸਕੀ ਨਾ ਹੋ ਸਕੂਗੀ ਕਿਸੇ ਦੀ ਠੀਕ ਹੈ ਜੀ ਇੱਥੇ 21ਵੀਂ ਸਮਾਪਤੀ ਹੈ ਨਾਲੇ ਹਾਂ ਕਲੀ ਕੀ ਵਾਰ ਮਹੱਲਾ ਤੀਜਾ ਇਹਦੀ ਵੀ ਸਮਾਪਤੀ ਹੈ ਹੁਣ ਆਪਾਂ ਅਗਲੀ ਵਾਰ ਸ਼ੁਰੂ ਕਰਾਂਗੇ RAM ਕਲੀ ਕੀ ਵਾਰ ਮਹੱਲਾ ਪੰਜਵਾਂ ਜੀ